श्लोक महल्ला 5 मन में चित उदम करो उद्यम करो उठनीत हरकीर्तन का आहरो हर देओ नानक के मन चित वो चितवनी उद्यम करो उठनीत मन दे विच की जित बो जे चितवणा है ओ चितवनी चितबो चितवंता जे बंदे ही कोई गल नहीं ਉੱਦਮ ਕਰੋ ਰੱਦੀ ਤੇ ਚਦੋ ਸਾਡੇ ਦੇ ਹੱਥ ਨੇ ਭਾਈ ਉੱਦਮ ਨਾਲ ਚਾਵਲ ਵਿਚਾਰ ਲੱਗ ਜਾਣਾ ਗੁਰਬਾਣੀ ਪਲਦੀ ਕਚਾਰ ਦੀ ਹੁਣ ਦੀ ਕਰਕੇ ਹਰ ਆਹਰੋ ਹਰ ਦੇਹੋ ਨਾਨਕ ਕੇ ਮਾਹ ਦੇ ਕੀਰਤੀ ਕਰਾਂ ਇਹ ਆਹਾਰ ਦੇ ਮੇਨੂੰ ਆਹਾਰ ਆਹਰ ਦਾ ਗਲੂ ਕਾ ਜੱਜਾ ਮੈਂ ਬਣ ਜੂਗਾ ਪਹਿਲਾਂ ਸ਼ਬਦ ਵਿਚਾਰ ਕਰਦਾ ਠੀਕ ਹੈ ਜੀ ਭਾਈ ਮੈਂ ਸ਼ਬਦ ਵਿਚਾਰ ਗੁਰਬਾਣੀ ਰਚਨ ਦੀ ਸਤਿਥਾ ਦੇ ਵਿੱਚ ਲਾ ਜਵ ਆਹਰ ਕਰੂਗਾ ਪਹਿਲਾਂ ਤਾਂ ਉਦਮ ਕਰਦਾ ਹੈ ਇਹਦੇ ਵਾਸਤੇ ਕਰਦਾ ਕਿ ਇੱਥੇ ਤੱਕਦੇ ਪਹੁੰਚਣ ਗੁਰਬਾਣੀ ਦਾ ਸਤਾ ਦੇ ਮੀਂਹ ਦੁੱਧ ਬਣਾ ਸਕਦਾ ਹੈ ਵੀ ਮੈਂ ਵੀ ਕਰ ਸਕਲ ਪਹਿਲਾਂ ਤਾਂ ਸਿੱਖਦਾ ਉਦਮ ਕਰ ਸਕਦੇ ਵਾਸਤੇ ਦੇਖ ਲੈਂਦਾ ਗੁਰਬਾਣੀ ਚ ਫਿਰ ਬਣਾਉਣ ਦੇ ਕਾਬਲ ਬਣ ਜੂ ਤਾਰੋ ਇੱਥੇ ਤੱਕ ਪਹੁੰਚ ਦੇ ਗਾਂਦ ਕੇ ਦ੍ਰਿਸ਼ਟ ਧਾਰ ਪ੍ਰਭ ਰਾਖਿਆ ਮਨ ਰਤਾ ਮੂਲ ਨਾਨਕ ਜੋ ਪ੍ਰਭ ਪਾਣੀਆਂ ਮਰੋ ਵਿਚਾਰੀ ਸੂਲ ਜਿਸ ਧਾਰ ਪ੍ਰਭ ਰਾਖਿਆ ਸਭ ਨੇ ਐਸੀ ਕਿਰਪਾ ਦੀ দৃষ্টি ਕੀਤੀ ਕਿਰਪਾ ਦੀ ਬਿਹਰ ਦੇ ਲਾ ਕੀਤੀ ਰੱਖ ਲਿਆ ਬਚਾ ਲਿਆ ਡੁੱਬਦੇ ਤੋਂ ਬਚਾ ਲਿਆ ਠੀਕ ਰਤਾ ਮੂਲ ਮਾਨਵ ਤਾਂ ਆਪਣੇ ਗੂੜ ਪਰਦਾ ਹੀ ਰੱਬ ਚੜ੍ਹਦਾ ਜਹ ਜਿਹਦਾ ਗੂੜ ਜਿਹੜਾ ਉਹ ਜਾਈ ਬਣਾਤਾ ਰੱਬ ਖੇ ਫਿਰ ਤੋਂ ਮਰੋ ਵਿਚਾਰੀ ਸੂ ਜਿਹੜਾ ਪਾਣੇ ਵਿੱਚ ਚੱਲੂਗਾ ਪਰਮ ਨੂੰ ਪਾ ਗਿਆ ਮਰੂ ਵਿਚਾਰੀ ਔਰ ਵਿਚਾਰਦਾ ਰਹੂਗਾ ਉਹਦੀ ਬਹੁਤ ਮਰਜ਼ੂਗੀ ਇਹ ਵਿਚਾਰ ਦੇ ਵਿੱਚ ਵਿਚਾਰ ਕਰਦਾ ਰੂ ਕਰਦਾ ਰੂ ਦੇਖੋ ਕਿ ਉਹਦੀ ਬਹੁਤ ਸੂਲ ਮੌਜੂਦ ਰੂ ਹੈ ਜੇ ਸੂਲੀ ਤੋਂ ਬਣਿਆ ਹੈ ਸੂਲ ਕੀ ਹੋ ਗਿਆ ਨੂੰ ਹੋ ਗਿਆ ਹਾਰਟ ਅਟੈਕ ਆ ਹੋ ਗਿਆ ਕਹਿੰਦਾ ਭਾਬੀ ਅਕਾਲ ਮੂਰਤ ਹੋ ਚਾਰੇ ਪਦਾਰਥ ਗੁਲ ਜਾਣਗੇ ਜਦ ਤਦ ਤੱਕ ਠੀਕ ਹੈ ਜੀ ਉਹ ਬੰਗੈ ਵੀ ਇਹੀ ਸੀ ਹਾਂ ਜੀ ਬੰਗੈ ਦੇ ਪੰਥ ਕੀ ਚ ਵੀ ਮੈਂ ਕਾਬਲ ਹੋ ਜਾਂ ਬਸ ਕਾਬਲ ਹੋ ਗਿਆ ਨਾ ਬਹਿ ਗਿਆ ਬਹੁਤ ਮਰ ਗਈ ਠੀਕ ਹੈ ਜੀ ਉਹ ਜਿਹੜੀ ਸੂਲੀ ਸੀ ਸੂਲ ਅੰਦਰ ਵੀ ਮੈਂ ਵੀ ਹੋ ਜਾ ਬੰਦੂ ਬਰਜਵੇਂ ਉੱਨਗੀ ਤਾਂ ਦਾ ਮਤਲਬ ਨਾ ਕੋਈ ਤੇ ਦੋਤ ਮਰੀਆ ਨਾ ਕੋ ਮੌਤ ਹੋ ਤੇ ਜਿਉਂ ਦੀ ਇੱਛਾ ਜਿ ਕੋਰੀ ਹੋਈ ਜਿਨਾ ਜਿਹੜੇ ਇੱਛਾ ਪੂਰੀ ਦੀ ਉਸ ਦੀ ਉਹਨਾਂ ਜਿਹੜਾ ਸੂਰ ਹੈ ਜਿੰਦਗੀ ਹੈ ਉਹ ਸੂਰ ਮੰਨ ਗਈ ਇੱਛਾ ਪੂਰੀ ਹੋ ਗਈ ਗਲਤ ਹੈ ਠੀਕ ਹੈ ਜੀ ਪੌੜੀ ਜੀ ਕੀ ਇਹੀ ਜੀ ਦੀ ਇੱਛਾ ਹੋਵੇ ਤੇਰੀ ਦੀ ਚਾਹ ਹੋਵੇ ਜੀ ਤੂਰਪੇ ਅਰਦਾਸ ਕਰ ਲੈ ਕਰੁਰਪੇ ਅਰਦਾਸ ਕਰ ਲਿਆ ਕਰ ਅਰਦਾਸ ਕੀਤੀ ਸੀ ਪਿੱਛੇ ਬਸ ਇਸ ਕਾਬਲ ਹੋ ਜਾਉ ਗੁਰਦਾਨੀ ਨਾ ਮਾਉ ਤੇਰੀ ਨਾ ਪੂਰੀ ਇਸ ਕਰਕੇ ਅਰਦਾਸ ਕਰ ਲਿਆ ਕਰ ਗੁਰਪੇ ਅੰਦਰੇ ਨਾ ਗੁਰਦਾਨੀ ਜਾ ਜਣਾ ਨਾ ਕਰਿਆ ਕਰ ਪੈਸੇ ਦੇ ਕੇ ਯਕੀਨ ਹੋ ਜਾਏਗਾ ਕਰਤਾਂ ਠਕਦੇਗਾ ਜੋ ਜਲੇ ਜਾਣਗੇ ਜਿਹੜਾ ਕੋਈ ਜਾਣ ਤੇਰੇ ਦਸ ਜੀ ਚਿੱਤ ਦੇ ਮੁਰਿਆ ਦਾਸ ਕਰੋ ਹਾਂਜੀ ਮਨ ਤਨ ਅਰਪ ਧਰ ਸਾਰੇ ਚਾਂਪ ਛੱਡ ਕੇ ਵਾਣ ਤਨ ਉਤੇ ਅਗੇ ਰੱਖ ਵਿਚਾਇਨ ਮਰਜ਼ੀ ਕਰ ਦੇ ਇਹਨੂੰ ਵਧੀਆ ਬਣਾ ਦੇ ਹੁਣ ਤੂੰ ਮਿੱਤਦਾ ਜਾਏ ਜੇ ਬਣਾਣਾ ਬਣਾ ਤੇ ਨਾ ਲੰਦ ਘਟ ਜੇ ਘਟ ਦੇ ਹੁਣ ਤੂੰ ਠੀਕ ਹੈ ਜਿੱਤੋਂ ਖਰਾਬ ਸੰਗੀ ਭਵਜਲ ਬਖਮਤਰ ਪੂਜਿਓ ਜਾਏ ਜਰ ਗੁਰ ਕੇ ਚਲਣਾਂ ਦੀ ਪੂਜਾ ਇਹ ਕਰਕੇ ਕੀਤੀ ਹੈ ਦੋਰਮਤ ਜਲ ਜਵੇ ਬਿਲੇ ਉੱਤੋਂ ਦੋਰਮਤ ਗੁਰ ਕੇ ਚੱਲਣਾ ਨਾਲ ਲੱਗਦੀ ਐ ਅਕਲ ਚ ਪਾਪੇ ਜਲ ਜਾਂਦੇ ਜੇ ਗਵੰਦਨ ਦੀ ਦੇ ਚਲੀ ਜਾਵੇ ਉਹ ਜਲ ਜਾਂਦੀ ਐ ਵੀ ਦੇਖ ਲੜਾਈ ਇਹਦੇ ਕਰਕੇ ਹੋਈ ਦੋਰਮਤ ਇਸ ਤਰ੍ਹਾਂ ਲਿਖੇ ਦੀ ਜਾਂਦੀ ਐ ਠੀਕ ਹੈ ਜੀ ਸਾਧ ਜਨਾ ਕੇ ਸੰਗੀ ਸਾਜਰਾਂ ਕੇ ਸੰਗ ਸਾਜਰਾਂ ਦੀ ਸੰਗਤ ਕਲ ਪਾਉਜਲ ਵਿੱਚ ਉਤਾਰ ਸਿਰ ਮਤਲੋਂ ਜਾਣਾ ਕੋਈ ਔਖਾ ਨਹੀਂ 1 7 ਜੇਲਾ ਦੂਏ ਸਾਤੇ ਚਲਿਆ ਜਾਵੇ ਜਰਜਤਾਂ ਸਭ ਮੇਰਾ ਕੇਲਾ ਉੱਥੇ ਕਦੇ ਚਲਿਆ ਹਾਂਜੀ ਦੇਵ ਅੱਗੇ ਡਰ ਸਤਗੁਰ ਦੇਵ ਜਿਹੜਾ ਦੇਵਦਰ ਹੈ ਉੱਤਰ ਦੇਵ ਨੂੰ ਜਾਣੇ ਹਿੰਦ ਉਹ ਤਰ ਗੁਰ ਪੀਆ ਦੇ ਪੀਆ ਦੇ ਉਹ ਵਾਹਿਦ ਦਈਆ ਕੁਝ ਬੋਗੜਾ ਨਹੀਂ ਸੋਤੇ ਅੱਛਾ ਜੀ ਨਾ ਫਰੋ ਸੇਵਾ ਐਸੀ ਕਰੋ ਨਾਲ ਮਰੇ ਅੰਦਰ ਦਰ ਪੈਦਾ ਹੀ ਠੀਕ ਹੈ ਜੀ ਮੈਂ ਕਰੇ ਨਿਹਾਲ ਉਨੇ ਸੁਭਰ ਦੇ ਸੁਭਰ ਸੁਪਰ ਪਰ ਉਹ ਇੱਕ ਛਣ निहाल कर ददा जितनी उन्ताई कमी है कभी वो पूरी भूल कर ददा सो पर पार पूरा, पार तड़ा। फिर ता पूरा ता कर ददा खड़ा फिरदा पूरा ज्ञान ना रोशना ददा के पर प्रकाश जैसे कर ऊपर पागली अवस्था कर ददा मन को होए संतोष सदा हर सो लगगा सतगुरु सेव ਬਹੁਤ ਕੋ ਹੋਏ ਸੁਤੋਗ ਬੰਦੂ ਸੁਤੋਗ ਹੋ ਜਾਂਦਾ ਹੈ ਜੇ ਇਹ ਸਦਾ ਹਰ ਜੇ ਸਦਾ ਹਲ ਹਲ ਵਿੱਚ ਧਿਆਨ ਰਹੇ ਤਦ ਸੁਤੋਕੀ ਹੋ ਜਾਂਦਾ ਹੈ ਜੇ ਆਪਣਾ ਜਾਂਦਾ ਸੋ ਲੱਗਾ ਸਤਗੁਰ ਸੇਵ ਕਰਮ ਤੁਰ ਕਿਆ ਕੋ ਕਰਮ ਤੁਰ ਤੈਨੂੰ ਤੁਰ ਕਰਮ ਪ੍ਰਾਪਤ ਹੋਇਆ ਹੈ ਕਿਹੜਾ ਪਰਮੇਸ਼ਰ ਤੇ ਕਰੋਗੇ پہلا جبڑ تو پہلا بھی لے کے لایا تھا اور پرمیشن دے کرو بھی اودے تے کرپا ہے دیشتی ہے او سی لگا پوری سیوا اج بغیر دی پین ٹھیک ہے اودوں ہی کرپا ہے اودے تے تو رو بھی کرپا تو رو کرپا تاں نو ملیا ہوا ہے ایتھے بھی ਇਹ ਤਾਂ ਘਾਰੇ ਤੱਕ ਚੱਲ ਸਕਦਾ ਸੀ ਕਲਾਸ਼ ਪਰਬਤ ਤੇ ਰਿਜਟ ਕਰ ਸਕਦਾ ਹੈ